प्यारे जिज्ञासुओ आज विज्ञान का युग है विज्ञान ने मनुष्य की खातिर बहुत ही सुख साधन पैदा किए हैं पर इन सुख साधन होने के बावजूद भी मनुष्य दुखी क्यों है जब तो मनुष्य संसार में आया है वो अपनी गलतियां कारण शारीरिक और मानसिक रोगों का शिकार होता रहा है ਸਰੀਰਕ ਰੋਗਾਂ ਤੋਂ ਉਪਰਤੀ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਆਯੁਰਵੇਦ ਫਿਰ ਯੂਨਾਨੀ ਕੁਦਰਤੀ ਇਲਾਜ ਹੈਮੋਪੈਥੀ ਅਤੇ ਐਲੋਪੈਥੀ ਦਾ ਨਿਰਮਾਣ ਹੋਇਆ ਇਨੀਆਂ ਇਲਾਜ ਪ੍ਰਣਾਲੀਆਂ ਹੋਣ ਦੇ ਬਾਵਜੂਦ ਵੀ ਮਨੁੱਖ ਰੋਗਾਂ ਤੋਂ ਮੁਕਤ ਨਹੀਂ ਹੋ ਸਕਿਆ ਰੋਗ ਵੜਦਾ ਗਿਆ ਜਿਉਂ-ਜਿਉਂ ਦਵਾਈ ਕੀ ਵਾਂਗ ਅਜ ਹਰ ਮਨੁੱਖ ਬੇਕੁਲ ਹੈ ਪਰੇਸ਼ਾਨ ਹੈ ਇਸ વૈਕੁਲਤਾ ਦਾ ਮੁੱਖ ਕਾਰਨ ਹੈ ਅਸ਼ਾਂਤੀ ਅਜ ਦਾ ਤਣਾਅ ਭਰਿਆ ਮਾਹੌਲ ਡਿਪਰੈਸ਼ਨ ਦਾ ਚਿੰਤਾ ਇਨ੍ਹਾਂ ਸਭਨਾ ਤੋਂ ਮੁਕਤੀ ਪ੍ਰਾਪਤ ਕਰਨ ਵਾਸਤੇ ਸਾਡੇ ਯੋਗੀਆਂ ਅਤੇ ਰਿਸ਼ੀਆਂ ਮੁਨੀਆਂ ਨੇ ਯੋਗ ਨਿਰਦਾਜ਼ਾ ਦਾ ਨਿਰਮਾਣ ਕੀਤਾ ਹੈ ਜਿਵੇਂ ਇੱਕ ਮਨੁੱਖ ਸਵੇਰੇ ਉੱਠਦਾ ਹੈ ਇਸ਼ਨਾਨ ਆਦ ਕਰਨ ਤੋਂ ਬਾਅਦ ਨਾਸ਼ਤਾ ਕਰਦਾ ਹੈ ਕੰਮ ਤੇ ਜਾਣ ਵਾਸਤੇ ਪੈਂਟ ਪਾਉਂਦਾ ਹੈ ਕਮੀਜ਼ ਪਾਉਂਦਾ ਹੈ ਕੋਟ ਪਾਉਂਦਾ ਹੈ 벨ਟ ਕੱਸਦਾ ਹੈ ਜਰਾਬਾਂ ਅਤੇ ਬੂਟ ਪਾਉਂਦਾ ਹੈ ਟਾਈ ਲਗਾਉਂਦਾ ਹੈ ਸਰਦਾਰ ਜੀ ਸਿਰ ਤੇ ਦਸਤਾਰ ਬੰਨਦੇ ਹਨ ਅਤੇ ਇਹ ਸਭ ਕੁਝ ਤਿਆਰੀ ਤੋਂ ਬਾਅਦ ਮਨੁੱਖ ਆਪਣੇ ਕੰਮ ਤੇ ਚਲਾ ਜਾਂਦਾ ਹੈ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਰਾਤ ਨੂੰ ਕਰ ਬਰਤਦਾ ਹੈ ਤਾਂ ਤੰਤ ਤੇ ਕੱਪੜੇ ਕੱਸੇ ਹੋਣ ਕਰਕੇ ਆਪਣੇ ਆਪ ਨੂੰ ਕੁੱਟਲ ਮਹਿਸੂਸ ਕਰਦਾ ਹੈ उस कुटन तो ਮੁਕਤੀ ਪ੍ਰਾਪਤ ਕਰਨ ਲਈ ਮਨੁੱਖ ਆਪਣੇ ਕੱਪੜੇ ਉਤਾਰ ਕਿੱਲੀ ਨਾਲ ਟੰਗ ਦਿੰਦਾ ਹੈ ਅਤੇ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕਰਦਾ ਹੈ ਪਰ ਮਨ ਦੀ ਕਟਨ ਬਲਤਾ ਉਸਨੇ ਧਿਆਨ ਹੀ ਨਹੀਂ ਦਿੱਤਾ ਸਾਰੇ ਦਿਨ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਡਰ ਕਾਇਦਾ ਤਾਂ ਇਹ ਹੈ ਕਿ ਜਿਵੇਂ ਮਨੁੱਖ ਤਨ ਦੀ ਕੁੱਟਨ ਮਹਿਸੂਸ ਕਰਦਿਆਂ ਹੋਇਆਂ ਆਪਣੇ ਕੱਪੜੇ ਉਤਾਰ ਕੇ ਰੱਖ ਦਿੰਦਾ ਹੈ ਉਸੇ ਤਰ੍ਹਾਂ ਆਪਣੇ ਮਨ ਦੇ ਕੱਪੜੇ ਉਤਾਰ ਕੇ ਦੂਰ ਛੁੱਟ ਦੇਵੇ ਅਤੇ ਆਰਾਮ ਨਾਲ ਸੁਖ ਦੀ ਨੀਂਦ ਸੌ ਜਾਵੇ ਅਤੇ ਸੰਸਾਰ ਦੀਆਂ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਵੇ ਇਹਨਾਂ ਚਿੰਤਾਵਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਸਭ ਤੋਂ ਵਧੀਆ ਤੇ ਸਸਤਾ ਸਾਧਨ ਹੈ ਯੋਗ ਨਿਦਰਾ ਆਹ ਹੁਣ ਯੋਗ ਨਿਦਰਾ ਕਰਦੇ ਹਾਂ